ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਖੇਮ ਕੁਸ਼ਲ ਸਹਿਜ ਆਨੰਦ ਉਹਦੇ ਬਾਅਦ ਜੇ ਤੁਸੀਂ ਰਾਹ ਪੈ ਗਏ ਨਾ ਫੇਰ ਖੇਮੇ ਖੇਮੇ ਜੇ ਖਮਾ ਦੀ ਸਬਦੇ ਹੰਦਾਂ ਗੁੱਸਾ ਤਿਆਗਤਾ ਸਬਦੇ ਪਿਛਡੋ ਪਰਿਆਰਜ ਦੀ ਹੈ ਇਹ ਦੁਨੀਆਂ ਦੀ ਬੜੀ ਇਸ ਕੀ ਪਿਆ ਤਿਆਗ ਤੋਂ ਜੇ ਤੁਸੀਂ ਇਹ ਰੋਹ ਕਾਲ ਇਹ ਰੋ ਕਰਨੇ ਖੇ। ਇਹ ਦੁਨਿਆਵੀ ਵਿੜਾਈ ਨੂੰ ਤਿਆਗ ਦੋ। ਤੇ ਆਪਣੇ ਹੰਕਾਰ ਨੂੰ ਤਿਆਗ ਦੋ। ਕਹੋ ਭਾਈ ਜੀ ਨੇ ਰਾਜ ਕਰਨਾ ਕਰ ਲਓ ਮੈਂ ਤਾਂ ਕਰਨਾ ਛੱਡੀ ਹੋਈ। ਇਹ ਖਿਮਾ ਠਮੋ ਤਿਆਗੋ। ਵਾਇਦੇ ਕੁਛ ਲੈ ਕੁਛ ਲੈ। ਜੈ ਖਿਮਾਤਾ ਹੈ। ਆਪੋ ਖਿਮਾ ਹੋਈ ਤੂੰ ਹੀ ਮੁੜ ਕੇ ਸੋਈ ਮੁੜ ਕੇ ਤੂੰ ਪਿਆਜਾ ਕੋ ਕਹਤਾ ਹੋਇ ਜੇ ਤੋ ਵੱਡਾ ਕੋਈ ਹੋਰ ਹਈ ਨਹੀਂ ਤੂੰ ਆਪੇ ਸੋਨਾ ਬਣ ਗਿਆ ਜੈ ਸ਼ੇਵਤਾ ਤੂੰ ਤਾਂ ਖਿਵਾ ਕਰੇਗਾ ਪ੍ਰਭੂ ਜਦੋਂ ਰੂਪ ਤੇ ਸਾਡੀ ਦੁਨੀਆ ਨੂੰ ਉਜਾਗਰ ਨਹੀਂ ਕਰੇਗਾ ਅਫਰਾਦੀਆਂ ਸਾਡੀ ਦੁਨੀਆ ਲੈ ਕੇ ਫੜ ਕੇ ਸਾਡੋ ਜਿਹੜੇ ਰਾਜ ਹੱਥੇ ਬਣਾ ਕੇ ਚੱਲੇ ਹੋਏ ਨੇ ਗੁਪਤਾ ਛੰਡੇ ਉਹ ਰਾਹ ਚਾਹੇ ਕਹਨੂ ਧਰਮ ਹੋਵੇ ਵਿਨਾਸ਼ ਜ਼ਾਰਾ ਹੋ ਉਹ ਵਿਨਾਸ਼ ਜ਼ਾਰਾ ਹੈ ਜਿਹੜੇ ਹਿੜਨਾ ਜੰਤੇ ਨੇ ਨਾ ਲੋਕ ਕਹਿੰਦੇ ਨੇ ਜੋ ਹੈਗੇ ਨੇਤਾ ਉਹ ਵਿਨਾਸ਼ ਜ਼ਾਰਾ ਹੈ ਉਹ ਧਰਮ ਵਿਨਾਸ਼ਕਾਰੀ ਆ ਧਰਮ ਨਹੀਂ ਆ ਤਰੁ ਕਾਉਨ ਹੁੰਦਾ ਸੇਵ ਕੋਸ਼ਲ ਸਹਜ ਹੋਇਆ ਜਾਣਾ ਸਹਜ ਹੋਣਾ ਜਿੱਤੇ ਸਹਜ ਹੈ ਟਕਾਉ ਹੈ ਆਨੰਦ ਹੈ ਉਹ ਧਰਮਾ ਜੇ ਤੋ ਆ ਚੀਜ਼ ਮਿਲੇ ਜੇ ਤੋ ਕਰਾ ਕੇ ਬੋਟਾ ਬਲਦੀਆਂ ਹੋਣ ਸਕੀਮਾਂ ਉਹ ਧਰਮਾ ਨਹੀਂ ਹੋਣੀ ਉਹ ਖਤਰਨਾਕ ਖੇਡ ਖੇਡਦੇ ਹੋ ਅਗਰਾਂ ਖੇਡਦੇ ਹੋ ਤੁਸੀਂ ਉਹ ਤਾਪਦਨ ਖੇਡਣ ਦੀ ਗੱਲ ਹੈ ਹੋ ਜੀ ਕੇਮ ਕੁਸਲ ਸਹਿਜ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਆਪਣੇ ਬਨ ਨੂੰ ਸਾਧੋ ਨਾਲ ਮੇਰੂ ਮਾਣਿਆ ਜਗਨੰਦ ਮਨ ਨਹੀਂ ਚਾਹੁੰਦਾ ਮੈਂ ਛੋਟਾ ਬਣਾ ਮੈਂ ਚਾਹੁੰਦਾ ਮੈਂ ਬڑا ਬਣੂ ਫਿਰ ਸਾਧੂ ਬਨੂ ਇਹ ਜਦ ਮਨ ਸਾਧਾ ਯਉ ਤਾਂ ਹੈ ਖਿਮਾਖੇ ਖਿਮਾ ਦੇ ਕਰ ਜਾਊਗਾ ਤਾਂ ਤੇ ਹੋਊਗਾ ਸਾਧ ਸੰਗੀ ਬਰਬੰਗ ਬਾਜ ਅਜ ਪਰਮਾਨੰਦ ਤਾਂ ਪਰਮਾਨੰਦ ਨਾਲ ਜੁੜੂਗਾ ਜਾ ਕੇ ਤੇ ਤਾਂ ਪਰਮਾਨੰਦ ਦੀ ਅਵਸਥਾ ਨੂੰ ਪ੍ਰਾਪਤ ਹੋਊਗਾ ਜੇ ਤਿਆਗ ਹੋਊ ਮਨ ਦੇ ਵਿੱਚ ਤਿਆਗ ਸੱਜਿਆ ਹੋਆ ਹੁਣ ਤਿਆਗੀ ਹੁੰਦਾ ਹੈ ਸਭ ਕੁਝ ਤਿਆਗੂਗਾ ਕੁਝ ਚਾਹੀਦਾ ਬਦੂ ਦੁਨੀਆ ਦੀ ਇੱਜ਼ਤ ਵੀ ਨਹੀਂ ਚਾਹੀਦੀ ਇੱਜ਼ਤ ਆਰ ਬਰਨਾਮੀ ਮਾਰੇ ਵਾਸਤੇ ਦੋ ਇੱਕੋ ਹੀ ਨੇ ਜ਼ਿੰਦਗੀ আর ਮੌਤ ਦੋ ਇੱਕੋ ਹੀ ਨੇ ਘਾਟਾ ਰਵਾ ਦਾ ਇੱਕੋ ਹੀ ਨੇ ਛੁੱਟੇ ਫੇ ਉਹ ਸੋਨਾ ਭੰਦਾ ਕਿਤੇ ਜਾ ਕੇ ਇਹ ਅਵਸਥਾ ਖੁਦ ਪੂਰਨ ਬ੍ਰਹਮ ਦੀ ਹੈ ਮਾਇਆ ਦਾ ਕੁਛ ਨਹੀਂ ਜਾਏਗਾ ਮਾਇਆ ਦਾ ਪਰੇ ਹੋਇਆ ਜੋ ਕੀ ਸਾਡੇ ਮਾਇਆ ਪੂਰਨ ਬ੍ਰਹਮ ਦੀ ਅਵਸਥਾ ਬਣਾ ਕੇ ਬਹਿੰਦਾ ਕਿ ਆਪਣੀ ਜਾਣੇ ਜੋਗੀ ਜਿਹੜੇ ਤਿਆਗਦੇ ਨੇ ਉਹ ਖੇ ਉਹ ਖੇ ਹੈ ਸ੍ਰਿ ਕੁਸ਼ਲ ਸਾਹਿਬ ਜਾਨਦਾਰੀਓ ਗੱਲ ਸੀ ਪਰ ਅੰਦਰੋਂ ਵੀ ਕਾਦੀਵਾਰੋਂ ਖਾ ਲਏ ਬੰਦ ਕਰਕੇ ਨਹੀਂ ਤਿਆਗਾਇਆ ਤਿਆਗਨ ਦਾ ਉਹਨਾਂ ਨੇ اڈੰਬਰ ਕੀਤਾ ਤਿਆਗਨ ਦਾ ਦਿਖਾਵਾ ਕੀਤਾ ਦਿਖਾਵੇ ਨਾਲ ਹੀ ਚੀਜ਼ ਚੱਲ ਹੁੰਦੀ ਹੈ ਨਰਕ ਨਿਵਾਰ ਆਧਾਰੋ ਜਿਓ ਗੁਣ ਗੋਬਿੰਦ ਅਮਰਤ ਰਸ ਪੀਓ ਤਰਕਨਵਾਰ ਉਧਾਰੋ ਜਿਓ ਜਿਹੜਾ ਨਰਕ ਵੱਲ ਨੂੰ ਜਾ ਰਿਹਾ ਹੈ ਨਾ ਅਸੀਂ ਹਰ ਵਕਤ ਸਾਡੀ ਸੋਚ ਤਰਕ ਵੱਲ ਨੂੰ ਜਾ ਰਹੀ ਹੈ ਕਿਰਣਾ ਵਾਂਦੀ ਹੈ ਨਰਕ ਵੱਲ ਨੂੰ ਸੋਚ ਜਾਂਦੀ ਹੈ ਦੁਭਰੰਤ ਵਾਂਦੀ ਤਾਰ ਬਰੋਲ ਬੰਦਾਂ ਰਸਬਲ ਨੂੰ ਜਾ ਰਹੇ ਆ ਕਿਤੇ ਘਰ ਕਾ ਵੀ ਸੋਚ ਐ ਸਰਦਨਵਾਰ ਇਹ ਛੱਡ ਦਿਓ ਰਿਵਾਰਡ ਕਰੋਗਾ ਸੁਣਾ ਲੋ ਜੀ ਬਾ ਨੂੰ ਜੀਉ ਨੂੰ ਬਚਾ ਲੋ ਤਾਂ ਕਿ ਬਚੂਗਾ ਇਹ ਨੌਫਰ ਛੱਡ ਦਿਓ ਤਾਂ ਭਗਤ ਕਿਧਰ ਕਰੋਗੇ ਕਿਧਰ ਕਰੋਗੇ ਲੋਕੋ ਸਭ ਦੇਰ ਤੱਕ ਰਾਮ ਰਾਮ ਨਾਲ ਕਰੋ ਨਫ਼ਰਤ ਉਹ ਤੁਸੀਂ ਤਾਂ ਆਰਾਮ ਨਾਲ ਨਫ਼ਰਤ ਕਰਦੇ ਹੋ ਉਹਦੇ ਨੂੰ ਜੀਦਾ ਹੀ ਨਹੀਂ ਵੀ ਰਾਮ ਸਾਹਿਬ ਦੇ ਅੰਦਰ ਇਹਨਾਂ ਨੇ ਰਾਮ ਬਾਹਰ ਬਣਾਇਆ ਤੇ ਨਫ਼ਰਤ ਕਰਨ ਦੇ ਉਹਨਾਂ ਦਾ ਆਰਾਮ ਅੰਦਰ ਹੈ ਹੀ ਨਹੀਂ ਇਹਨਾਂ ਦਾ ਅੰਦਰ ਰਾਮ ਨਾਲ ਨਫ਼ਰਤ ਕਰੇ ਨਹੀਂ ਸਕਦੇ ਜੇ ਰਾਮ ਬਾਹਰ ਨਫ਼ਰਤ ਕਰੂਗੇ ਸਾਰੇ ਉਹ ਰਾਮ ਉਲਟੀ ਜਿਦਾ ਹੁੰਦਾ ਉਹ ਤੇ ਸਿੱਧਾ ਹੀ ਹੁੰਦਾ ਜੇ ਸਭੇ ਰਾਮ ਬੋਲਦਾ ਦੇ ਘਟ ਘਟ ਜਹਰ ਜੂ ਬਸਦਾ ਨਫਰਤ ਨੂੰ ਦੱਸੋ ਕੀ ਦੱਸੋ ਹੈ ਕਦੇ ਥਾ ਹਰੀ ਨਾਲੇ ਫਿਰ ਨਫਰਤ ਕਰਦੇ ਨੇ ਰਾਮ ਨਾਲੇ ਨਫਰਤ ਕਰਦੇ ਨੇ ਤਾਂ ਕਰੇ ਨਹੀਂ ਸਕਦੇ ਧਰਮ ਦੇ ਵਿੱਚ ਤੁਹਾਨੂੰ ਰਾਮ ਵਾਲੇ ਹਰ ਪ੍ਰਧਾਨ ਨਹੀਂ ਨਫਰਤ ਉਸੇ ਨਾਲ ਕਰਦੇ ਹੋ ਧਰਮ ਦੇ ਨਾਲ ਤਾਂ ਕਿੰਨਾ ਪਖੰਡਵਾਦ ਹੈ ਸਾਰੇ ਹੀ ਪਖੰਡਵਾਦ ਹੈ ਜ਼ਬਰਦਸਤ ਨੂੰ ਕਿੱਥੇ ਜਾ ਰਿਹਾ ਧਰਮ ਨੂੰ ਕਿਹੜਾ ਦਰਮਨ ਕੋਲ ਹੱਗੀ ਬੁਰਕੇ ਧਰਮ ਤੇ ਨਾਲੇ ਧਰਮ ਤੇ ਅੰਦਰ ਨਫਰਤ ਜੇ ਪੇਧਰ ਉਹਨੇ ਬినాਸ਼ਕਾਰੀ ਨੇ ਧਰਮ ਹੈ ਇਹ ਹੀ ਧਰਮ ਤੇ ਡੁਪਲੀ ਕੇ ਜਿਹੜੇ ਬినాਸ਼ਕਾਰੀ ਜੀਹਾਂ ਨੇ ਬਹੁਤ ਜਾਲਾਂ ਲੈ ਕਿਹਿਆ ਲੈਦੇ ਰਹਿਣਗੇ ਜੇ ਧਰਮ ਦੀ ਵਿਚਾਰਦਾ ਰਹੇਗੀ ਤੋ ਉਗੀ ਇਹ ਜਨਾ ਚਾਨਾ ਜਾਂਦੀਆਂ ਜਾਣਗੀਆਂ वेदना कटरो गा तो हुदा ही रहूगा नहीं हटना हर सकदा अपने अपने राजकाम कल खतत तळे बना के धर्मा ते नोटे दूजे नु वास्ते रहूगे कब्जे करते रहूगे ये चलदा ही रहूगा सिलसिला ए नहीं हटना हां जी नरक निवार आधारो जियो गुण गोविंद अमर द रस पियो गुण गोविंद दम रस पियो की करना है भी पेटो ਯਾ ਤਾਂ ਬਿਖਾ ਲੋ। ਵਾਇਆ ਬਿਖਾ। ਇਹ ਗੁਣ ਗੋਪੇ ਤੋਂ ਫਲ ਤਰਾ ਪੀ ਲੋ। ਦੋਜੀ ਜਾਂ। ਵਾਇਆ ਜੇ ਰਸਤਾ ਹੈਗਾ ਨਾ ਬਿਖਿਆ ਤੇ ਰਸ। ਯਾ ਤਾਂ ਬਿਖਿਆ ਤੇ ਰਸ ਨੇ ਤੇ ਪੀਣ ਨੂੰ। ਉਹ ਬਾਲ ਸ਼ਰੀਰ ਦੇ ਨੇ। ਅਦਲੇ ਦੀ ਵੀ ਰੁਚੀ ਆ ਕਰ ਫਰਮਾਇਸ ਆਇਆ। ਜੇ ਫਰਮਾਇਸ ਕਰਕੇ ਖਾਣਿਆ ਬਿਖਿਆ ਤੇ ਰਸ ਨੇ। ਜੇ ਤਾਂ ਉਧਰ ਜੁੜਿਆ ਹੈ। ਫੇਟੋ ਤੁਹਾਨੂੰ ਪਤਾ ਹੀ ਨਹੀਂ ਹੈ। ਇਹ ਤਾਂ ਵੰਧਾਈ ਦਾਰ ਨਹੀਂ ਬਟਾ ਕਹਿੰਦੀ ਸੇਵਾ ਕਰੇ ਨਹੀਂ ਸਕਦਾ ਸੇਵਾ ਵੀ ਧਰਮ ਉਹ ਵੰਧਾਈ ਕਰ ਸਕਦਾ ਚਾਹੇ ਰਾਸ਼ਟਰਪਤੀ ਹੋਵੇ ਚਾਹੇ ਮਹੇਸ਼ਰ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਚਾਹੇ ਜੱਜ ਹੋਵੇ ਜੇ ਨਾ ਧਰਮ ਉਹਦਾ ਠੀਕ ਨਹੀਂ ਹੈ ਸੇਵਾ ਨਹੀਂ ਕਰ ਸਕਦਾ ਉਹਦਾ ਜੋ ਮਰਜੀ ਕਰੀ ਜਾਵੇ ਜੋ ਮਰਜੀ ਉਹਨਾਂ ਕਹਿ ਜਾਵੇ ਕਰੇ ਨਹੀਂ ਕਰਦਾ ਉਹ ਵੀ ਤਾਂ ਹੋਂ ਮਰਜੀ ਕਰੂਗਾ ਜਿੱਥੇ ਮਰਜੀ ਤਾਂ ਸੇਵਾ ਨਹੀਂ ਹੁੰਦੀ ਯਾ ਤਾਂ ਵਿਖੇ ਦੇ ਰਸ ਨੇ ਇੱਥੇ ਜਾਂ ਫਿਰ ਗੁਣ ਗੋਵਿੰਦਾਂ ਪਰਤ ਰਸ ਨੇ ਉੜ ਕੀ ਬਿਣਾ ਕੀ ਰਹੀ ਬਿਣਾ ਜੇ ਧਰਮ ਕਾ ਆਦਮੀ ਤਾਂ ਵੀ ਵਿਖੇ ਰਸ ਪੀਣੇ ਨੇ ਧਰਮ ਕਾ ਦਾ ਗੁਣ ਗੋਵਿੰਦਾਂ ਪਰਤ ਰਸ ਪਿਓ ਪਿਓ ਗੋਵਿੰਦੇ ਗੁਣਾ ਤੇ ਉਹ ਚੋਂ ਪਰਤ ਰਸ ਪਿਓ ਤੋੜਾ ਕਰਦੇ ਹੀ ਉਹ ਤਾਂ ਸਿੱਖ ਉਹ ਨਹੀਂ ਕਰਦਾ ਜਿਹਨਾਂ ਦੇ ਗ੍ਰੰਥ ਵਿੱਚ ਲਿਖਿਆ ਹੋਇਆ ਦੋਇਆ ਨੇ ਤਾਂ ਦੋਇਆ ਨੂੰ ਤਾਂ ਅਸੀਂ ਦੱਸਣਾ ਸੀ ਉਹ ਦੋਇਆ ਨੂੰ ਦੱਸਿਓਂ ਦੱਸਣਾ ਸੀ ਅਸੀਂ ਤਾਂ ਆਪੇ ਨਹੀਂ ਕਰਦੇ ਅਸੀਂ ਤਾਂ ਆਪੇ ਕਹਿਣਾ ਵੀ ਬਾਣੀ ਨੂੰ ਰੱਖੋ ਇੱਕ ਪਾਸੇ ਪਹਿਲਾਂ ਰਾਜਗਾਮ ਕਰ ਲਈਏ ਇਹ ਪਿੱਛੇ ਪੜਾਂਗੇ ਆਪਾਂ ਪਹਿਲਾਂ ਸਾਰੀ ਦੁਆਇਆਂ ਤੇ ਰਾਜਗਾਮ ਕਰ ਲਈਏ ਆ ਤਾਂ ਇਹਨਾਂ ਦੇ ਅੰਦਰ ਚੂਰ ਹੁੰਦਾ ਰਾਜ ਦਾ ਇਹ ਕਿੱਥੇ ਰਿਹਾ ਗੁਰਮੁਣੀ ਜੀ गुण गोविंद परtras पीयो है हां जी चित चितवो नारायण एक एक रूप, रूप जागे रंग अनेक चित चितवो जे कोई चितबणा भी है ना अंदर कुछ इच्छा भी पैदा करनी है कोई प्लानिंग भी बनानी है निकलना चाहिए गाहरू कोई प्रोग्रामो लिखणा है ਕੀ ਉਲੀਕੋ ਨਾਰਾਇਣ ਕੋ ਇੱਕ ਨਾਰਾਇਣ ਸ਼ੀ ਹੈ ਉਹਦਾ ਨਕਸ਼ਾ ਕਿਹਾ ਜਾਣਾ ਚਾਹੀਦਾ ਕਿਥੋਂ ਲੁਕੂ ਉਹਦੇ ਬਾਰੇ ਚਤਮੋ ਕੋਈ ਇਹ ਕਾਲੇ ਬਾਰੇ ਚਤਮੋ ਗਾ ਇਹ ਰਾਣੇ ਦੇ ਕੋ ਬੈਠੀ ਨਹੀਂ ਬੜਦਲੀ ਆਪਨ ਆ ਜਦਵਰ ਗੋਲਗੋਨੀ ਜਾਣਦੇ ਨਹੀਂ ਆ ਜਦਵਰ ਇਹ ਤਾਂ ਕੇ ਇਥੇ ਗੁਰਬਾਨੀ ਨਾ ਕਰਨ ਜੇ ਤੇ ਜਵਨ ਨਾਰਾਇਣ ਹੈ ਤੋ ਜੇ ਇੱਕ ਖੇਤਬ ਦੇ ਨਾਰਾਇਣ ਲੇ ਕਹਿੰਦੇ ਇਹ ਦੀ ਸੀ ਕਮੇਟੀ ਦੂਜੀ ਬਣਨ ਉਹ ਤਾਂ ਸਵਾਲ ਨੇ ਤੇ ਕੀ ਫਾਇਦਾ ਹੋਵੇ ਦੂਜੀ ਕਮੇਟੀ ਦੇ ਕਮੇਟੀ ਦੀ ਲੋੜ ਨਹੀਂ ਸੀ ਪਣਦੀ ਗੋਲਕ ਦੀ ਲੋੜ ਨਹੀਂ ਸੀ ਪੈਣ ਤੁਹਾਨੂੰ ਕੋਈ ਝਗੜਾ ਹੀ ਹੋਰ ਤੋਂ ਵਿੱਚ ਹੋਣਾ ਹੀ ਨਹੀਂ ਸੀ ਗੁਰਦੁਆਰਿਆਂ ਦੀ ਲੋੜ ਨਹੀਂ ਸੀ ਪੈਣੀ ਘਰ ਘਰ ਅੰਦਰ ਧਰਮਸਾਲ ਸਾਰੇ ਦੇ ਅੰਦਰ ਫਿਰਦੇ ਧਰਮਸਾਲੇ ਬਣੀ ਹੋਈ ਆ ਸਿੱਖਤਾ ਕੱਲਾ ਸਿਚੂਏਸ਼ਨ ਹੁੰਦਾ ਆਪੇ ਯੂਨੀਵਰਸਿਟੀ ਹੁੰਦਾ ਕੱਲਾ ਹੀ ਜਿੱਦਾਂ ਜਾਂਦਾ ਪ੍ਰਚਾਰ ਕਰੀ ਜਾਂਦਾ ਉਹਨੂੰ ਕੀ ਕਾਦੀ ਲੋੜ ਹੈ ਭਈ ਜਿਹੜੇ ਤੇਤਵ ਨਾਰਾਇਣ ਇੱਕ ਇੱਕ ਨੂੰ ਜਾਗੇ ਤੇ ਅਨੇਕ ਜਿਹੜਾ ਨਾਰਾਇਣ ਇਹ ਕਦੀ ਚੇਤਨਾ ਕਰਤਾ ਨਹੀਂ ਜਿਹਨਾਂ ਨਾਰਾਇਣ ਇੱਕ ਦਾ ਦਰਸ਼ਨ ਕਰ ਲਿਆ ਉਹਨੂੰ ਕਿਸੇ ਕਰੰਤ ਦੀ ਲੋੜ ਹੈ ਫਿਰ ਚੱਕਰ ਦੇ ਇਹ ਤਾਂ ਗੁਰੂ ਰੂਹ ਦੇ ਨਾਲ ਨਾਲ ਸੱਲ ਹੀ ਫਿਰਦੇ ਜਨਨੋਂ ਕੁਝ ਆ ਕੇ ਆਪ ਨਾ ਖਾਲੀ ਖੜੇ ਹੋ ਜੁਰਨ ਤੋਂ ਦੇ ਖਾਲੀ ਰੱਬ ਉਹ ਨਾਲ ਕਿ ਲਾਣਾ ਸੀ ਉਹ ਨਾਲ ਕਰਾ ਸੱਲ ਨੇ ਆਪ ਜਿਹਨਾਂ ਨੇ ਲਿਖੇ ਨੇ ਉਹ ਨਾਲ ਲਈ ਫਿਰਦੇ ਉਹਨਾਂ ਤੋਂ ਪੜ੍ਹ ਕੇ ਪੜ੍ਹਾਉਂਦੇ ਸੀ ਇਹ ਤਾਂ ਸਾਨੂੰ ਰੋੜ ਪਈ ਐ ਤਾਂ ਪ੍ਰਕਾਸ਼ ਗਰ ਦੀ ਉਹ ਵੀ ਤਾਂ ਲੋੜ ਪੈਗੀ ਅਸਲ ਵਿੱਚ ਫਿਰ ਭਾਇਆ ਬਿਨਾਂ ਸਰਦਾਰ ਦੀ ਚੜਾਵਾ ਹੁਣ ਆदमी ਨੂੰ ਤਾਂ ਮੁਸ਼ਕਲ ਆ ਚੜਾਉਣਾ ਕੋਈ ਵੀ ਨਹੀਂ ਸੀ ਕਹਿੰਦਾ ਵੀ ਮੈਂ ਬਹਿ ਮੈਨੂੰ ਗੱਡੀ ਲਾ ਕੇ ਬੈਠਾਂ ਮੈਨੂੰ ਚੜਾਵਾ ਚਲੇ ਇਹ ਤਾਂ ਸਾਡੇ ਮਨਜੂਰ ਹੈ ਜੇ ਕੋਈ ਕਰਦਾ ਤਾਂ ਉਹਨਾਂ ਨੇ ਕਹਿੰਿਆ ਵੀ ਚਲੋ ਪੋਤੀ ਸਾਹਿਬ ਨੂੰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮੰਨ ਕੇ ਇਹਦੇ ਤੇ ਚੜਾ ਲਿਆ ਤਾ ਪਰ ਆ ਖੋਲ ਲਿਆ ਜਿਹੜਾ ਉਹਦਾ ਹੋਰ ਕੀ ਹੈ ਇਹ ਪੈਸੇ ਬਿਨਾਂ ਸਰਦਾ ਨਹੀਂ ਉਹ ਇਹ ਜਰਾ ਖੋਲਿਆ ਭਾਇਆ ਹੜਾ ਗਈ ਲੋਕੀ ਕਾਹਦਾ ਥੋੜਾ ਜਿਹਾ ਕੀਤਾ ਸੀ ਪਰ ਜਿਆਦਾ ਹੋ ਗਿਆ ਹੁਣ ਆ ਕੇ ਲੈ ਗਿਆ ਆਜੋ ਕੋ ਭਾਖੜਾ ਲੈ ਨੂੰ ਸਰਾ ਕਰ ਲਵੇ ਵੀ ਚਲ ਪਾਣੀ ਇੱਥੇ ਦੀ ਹੂੰ ਲੈਣ ਜਾਈਦਾ ਦੂਰੋਂ ਪਰਕੇ ਲੈ ਆਈਦਾ ਇੱਥੇ ਦੀ ਥੋੜਾ ਥੋੜਾ ਆਈ ਜੋ ਪੀ ਲਾਂ ਨੂੰ ਸਰਾਖ ਵਧੀ ਗਿਆ ਉਹ ਆਪੇ ਬੜਾ ਹੋ ਜਾਂਦਾ ਪਾਣੀ ਆਪੇ ਬੜਾ ਹੋ ਜਾਂਦਾ ਫਿਰ ਉਹ ਕਹਿੰਦਾ ਚਲੋ ਭਾਈ ਇਹ ਜਿਆਦਾ ਹੋ ਦੋ ਚਾਰ ਕਹਿ ਰਹੇ ਲਾ ਲੋ ਪਾਣੀ ਇੱਧਰ ਆ ਇੱਧਰ ਜਿੰਨੀ ਉਸੇ ਚ ਲੈਣਿਆ ਉਹਦਾ ਬਲਾ ਹੁੰਦਾ ਹੁੰਦਾ ਬੜਾ ਆਕੇ ਰਹਿ ਗਿਆ ਸਭ ਕੁਝ ਇਹਨਾਂ ਦਾ ਕਹੋ ਜੀ ਚਿੱਤ ਚਿਤਵੋ ਨਾਰਾਇਣ ਇੱਕ ਇੱਕ ਰੂਪ ਜਾ ਕੇ ਰੰਗ ਅਨੇਕ ਇਹ ਇੱਕ ਰੂਪ ਜਾ ਕੇ ਰੰਗ ਅਨੇਕ ਰੂਪ ਇੱਕੋ ਹੀ ਹੁੰਦੇ ਨਾਰਾਇਣ ਦਾ ਇੱਕ ਰੂਪ ਹੈ ਨਾਰਾਇਣ ਕੋਣਾ ਨਾਰਾਇਣ ਸੂਰਜ ਜਿੱਥੇ ਰਾਤ ਜਿੱਥੇ ਅਗਿਆਨਤਾ ਨਹੀਂ ਹੁੰਦੀ ਉਹ ਨਾਰਾਇਣ ਨਾਰਾਇਣ ਹੁੰਦੀ ਆ ਰਾਤ ਅਗਿਆਨਤਾ ਦਿਨ ਹੁੰਦਾ ਰਾਤ ਹੁੰਦੀ ਉਹ ਜਿੱਦੇ ਸਾਰੇ ਜਾਗਦੇ ਨੇ ਜਾਗਰਦਾ ਵਸਦਾ ਨੌਦਾ ਰਹਿਣ ਦੀ ਉਸਤ ਸੁਪਣਾ ਨਹੀਂ ਰਾਤ ਦੇ ਸੁਤਾ ਨਹੀਂ ਕੋਈ ਨਹੀਂ ਹੈ ਰਾਤ ਜਿਸ ਨਹੀਂ ਰਹਿਣ ਦਿੰਦਾ ਰਾਤ ਨੂੰ ਜੋ ਨਹੀਂ ਰਹਿਣ ਦਿੰਦਾ ਅਗਿਆਨਤਾ ਨੂੰ ਜੋ ਨਹੀਂ ਰਹਿਣ ਦਿੰਦਾ ਧੇਰੇ ਨੂੰ ਜੋ ਨਾਰਾਇਣ ਉਹ ਇੱਕ ਉਹ ਬਰਬਰ ਗੋੜਵਾਜ ਗਰਾਂਵ ਆ ਨਾ ਰਹਾ ਦੇਦੇ ਦਾ ਨਾਸਿਕ ਜਿਵੇਂ குரு ਗੁਰੂ ਦਾ ਗੁਰੂ ਆ ਨਾ ਰਹਿਣ ਕੋਈ ਅਰਥ ਨਹੀਂ ਰਹੋਇਲਾ ਬਰਨ ਅਰਥ ਨਹੀਂ ਰਹਿੰਦੇ ਰਹਿੰਦੇ ਰਹਦਾ ਤੇ ਗੂ ਨੇ ਰਹਦਾ ਸੰਸਕ੍ਰਿਤ ਗੂ ਕਹਿੰਦੇ ਨੇ ਕੱਗੇ ਨੂੰ ਓਕਾਰਾ ਜਿਹੜਾ ਨਾ ਇਹ ਗੁਪ ਦੇਰੇ ਨੂੰ ਅਰਥ ਹੈ ਜਨ ਗੁ ਉਹ ਨੂੰ ਅਸੀਂ ਕੋਈ ਗੱਲ ਦਾ ਰਹਿ ਨਹੀਂ ਆ ਰਾ ਜਿੱਥੇ ਗੁ ਰੂਪ ਦੇਰੇ ਨੂੰ ਦੇਰੇ ਦੀ ਜਗਾ ਪ੍ਰਕਾਸ਼ ਕਰਨ ਵਾਲਾ ਦੋਹਾਂ ਦੇ ਕੋਰਤ ਲਫ਼ਜ਼ ਦੋ ਨੇ ਅਰਥ ਕੋਈ ਨਹੀਂ ਸਭਰ ਕੀ ਲਫ਼ਜ਼ ਨੇ ਦੋ ਹਾਂਜੀ ਰੂਪ ਜਾ ਕੇ ਰੰਗਾਂ ਦੇ ਵਿੱਚ ਸੂਰਜ ਦੇ ਵਿੱਚ ਧੁੱਪ ਦਾ ਕੋਈ ਇਹ ਚਿੱਟੀ ਨਹੀਂ ਨੀ ਪਰ ਉਹਦੇ ਬਹੁਤ سارے ਰੰਗ ਰਹਿੰਦੇ ਨੇ ਐਵੇਂ ਕਹਾਂ ਬਹੁਤ ਸਾਰਾ ਹੈ ਸ੍ਰਿਸ਼ਟੀ ਦਾ ਗਿਆਨ ਵੀ ਉਹਦੇ ਵਿੱਚ ਹੀ ਹੈ ਜਿਹੜੀ ਵਿਵੇਕ ਹੈ ਜਿਹੜਾ ਤੋ ਵਿਵੇਕ ਹੈ ਸਿੱਖੀ ਵੀ ਉਸਨੇ ਕਹਿੰਦਾ ਕਿ ਇਹ ਮਾਰਾ ਗਿਆਨ ਵੀ ਉਹਦੇ ਵਿੱਚ ਹੀ ਹੈ ਉਹ ਬਹੁਤ ਪ੍ਰਕਾਰ ਦਾ ਬਾਇਆ ਗਿਆਨ ਹੈ ਜਿਹੜਾ ਤੱਤ ਗਿਆਨ ਹੈ ਉਹ ਹੋਰ ਚੀਜ਼ ਹੈ ਜਿਹੜਾ ਸੰਸਾਰਿਕ ਗਿਆਨ ਹੋਰ ਚੀਜ਼ ਹੈ ਸੰਸਾਰਿਕ ਗਿਆਨ ਬਹੁਤ ਦੀ ਹੈ ਕਿ ਦਰਗਾਹੀ ਜਾਨੇ ਕੋਰਕ ਦਾ ਹੋਈ ਜੰਗਲ ਆਉਣਾ ਦੇ ਦਾ ਮੋਦਰ ਦੀਨ ਬਿਆਲ ਦੁਖ ਭੰਜਨ ਪੂਰਨ ਕਿਰਪਾਲ ਦਾ ਮੋਦਰ ਗੋਪਾਲ ਕੋਪਾਲ ਤੋਂ ਮੋਦਰ ਦੀਨ ਬਿਆਲ ਗੋਪਾਲ ਹੈ ਜਿਹੜਾ ਜਿੰਨੀਆਂ ਵੀ ਰੂਹਾਂ ਨੇ ਜਿੰਨੇ ਵੀ ਆਤਮਾਾਂ ਨੇ ਸਾਰਿਆਂ ਦੀ ਪਾਲਣਾ ਕਰਦਾ ਵਾੜਾ ਗੋਪਾਲ ਗੋਦਾ ਮੋਦਰ ਆਤਮਾ ਹੁੰਦਾ ਹੈ ਗੋ ਜਿਹੜਾ ਰੱਖਦਾ ਆਤਮਾ ਜੋ ਜਿੰਨ ਬੋ ਜੁਨੀ ਕਰਨੀ ਉਹ ਬੜੀ ਹੋਈ ਆਤਮਾ ਨੂੰ ਜੁਦੀ ਕਰ ਦਣਾ ਉਹ ਸੁਤੀ ਹੋਈ ਬੜੀ ਹੋਈ ਉਦਿਆ ਹੋਤੀ ਬੜੀ ਤਾਂ ਜਿੰਦੀ ਹੁੰਦੀ ਹੋਦੀ ਸੁਤੀ ਆਤਮਾ ਨੂੰ ਜੁੜਾ ਦੇਣਾ ਉਹ ਆਤਮਾ ਨੂੰ ਜੁੜਾ ਜਾਣਾ ਦਾ ਮਤਲਬ ਹੈ ਉਹ ਵੀ ਜੁਦੀ ਕਰਦਣਾ ਸੋਈ ਸੋਈ ਜਾਂਦੀ ਗੋਪਾਲ ਦਾ ਮਤਲਬ ਪੜਨਾ ਕਰਨਾ ਉਹਦੀ ਦੋ ਮੁਰਤ ਤੇ ਕਰਨਾ ਔਰ ਜਗਾਉਦੇ ਵੀ ਰਹਿਣਾ ਪਰਨਾ ਵੀ ਕਰਨਾ ਜਗਾਉਣਾ ਵੀ ਹਾਂ ਗੰਮ ਉਦਰ ਤਾਂ ਉਦਰ ਹੈ ਜਿਹੜਾ ਉਦਰ ਦੇ ਵਿੱਚ ਸਾਂ ਲੈਦਾ ਗਾਮ ਗੰਮ ਉਦਰ ਹੈ ਉਦਰੇ ਪੇਟ ਵਿੱਚ ਸਾਂ ਲੈਣ ਵਾਲਾ ਹੈ ਉਦਰ ਹੁੰਦਾ ਪੇਟ ਪੇਟ ਵਿੱਚ ਉਤਰੇ ਸਾਂ ਲੈਦੇ ਦਬੋਦਰ ਦੀਨ ਦੇ ਆਲ ਦੀਨ ਦੇ ਆਲ ਦੇ ਅੱਗੇ ਇਹ ਕਰਦਾ ਜਿਹੜਾ ਉਹਦੇ ਅੱਗੇ ਦੀਨ ਹੋ ਜੀਏ ਦੇਖੋ ਗਰਮ ਜਿਹੜਾ ਕਰਿਆ ਤੇ ਪਰ ਹਰ ਕਰਦਾ ਧੀਰਜ ਦੇ ਜਾਂਦਾ ਜੇ ਤਾਂ ਕਿ ਝੁਕ ਜਵੇ ਉਹਦੇ ਉਹਦੀ ਚੱਲਦਾ ਹੋਵੇ ਛੜਨ ਫੇਟਾ ਦੇ ਜਾਂਦਾ ਫੇਟਾ ਨੂੰ ਕੁਝ ਨਹੀਂ ਕਹਦਾ ਜੇ ਅੰਗੇ ਵਾਲੇ ਸੋ ਚੜੇ ਚੱਲ ਨੂੰ ਸੋ ਉਤਰੇ ਦੇਖੋ ਇਹ ਲਫਜ਼ ਸਿਤਾ ਦੇ ਗੁਣਾ ਹੈ ਕਹਵਲੇ ਦੇ ਮਨਾਂ 80 ਚੜੇ 100 ਨਗਰ ਚੜੇ ਜੜਾ ਗੇੜੂਗਾ ਉਹ ਉੱਥੇ ਪ੍ਰਹਾਰ ਕਰੂ ਝਾੜ ਕੇ ਫਿਰ 60 ਪਰੇ ਜੋਤਲੇ ਹਾਂ ਗੋਪਾਲ ਤੋਂ ਦੀਨ ਤੇ ਆਦ ਦੁੱਖ ਪੰਜਨ ਪੂਰਨ ਕਿਰਪਾ ਦੁੱਖ ਪੰਜਨਾ ਠੀਕ ਦੁੱਖ ਪੈਨ ਠੀਕ ਕਰਦਾ ਦੁੱਖ ਪੰਜਨ ਕਰਦਾ ਦਾਸਾਂ ਦੇ ਇਰੇ ਹੋਲੇ ਅਗੇ ਦੀਨੇ ਸੇ ਉਹਦਾ ਵਿਆ ਕਰਦਾ ਵਿਆ ਕਰਦਾ ਉਹ ਜਿਧਰ ਵੀ ਦੁੱਖ ਕਿਰਪਾ ਕਰਦਾ ਸਰ ਪੂਰਨ ਕਿਰਪਾਲੂ ਨਾਨਕ ਜੀ ਕਾ ਇਹ ਉਦਾਸ ਸਿਮਰ ਸਿਮਰ ਨਾਮ ਬਾਾਰ ਉਹਦਾ ਨਾਮ ਹੈ ਜਿਹੜਾ ਉਹਦਾ ਜਿਹੜਾ ਹੁਕਮ ਹੈ ਉਹਦਾ ਬਾਾਰ ਬਾਾਰ ਸਿਮਰਨ ਕਰਨਾ ਚਾਹੀਦਾ ਬਾਾਰ ਬਾਾਰ ਉਸੇ ਦਾ ਚੇਤਾ ਰੱਖਣਾ ਚਾਹੀਦਾ ਉਹਦੇ ਵਿਚਾਰੇ ਕੁਝ ਨਹੀਂ ਹੋਣਾ ਚਾਹੀਦਾ। ਜੇ ਵਿਚਾਰੇ ਕੋਈ ਹੋਰ ਗੱਲ ਚੱਲ ਗਈ ਉਹਨੂੰ ਟੁੱਟ ਜਾ ਕੇ ਸਮੜ ਲਓ। ਫੇਰ ਛੁੱਟ ਜੂਗਾ। ਪਰ ਬਾਗਮੱਲ ਲਗਾਤਾਰ ਰੋਜ਼ਾ ਜੈਸੇ ਬੜਦੇ ਲੋ ਜੇ ਲੜ ਇੱਕ ਵਾਰ ਛੁੱਟ ਗਿਆ ਉਹ ਦੁਬਾਰਾ ਸਬਰ ਜੁੜਨਾ ਹੀ ਨਹੀਂ। ਸਿਮਰ ਸਿਮਰ ਨਾਮ ਬਾਰੰਗ ਨਾਮ ਬਾਰੰਗ ਬਾਰ ਇਹਦਾ ਸਬਰ ਸੋਲਣ ਕਰ किते गलत नहीं समझ लिया बार-बार दा मतलब वे भी नहीं है ठीक रास्ते जा रहे हो ठीक है समझ रहे हो कि, कि तो गलत तरीके कि तो गलत तरी समझ लेया ये बार-बार सब गलत अपनी करेक्शन करते रहो तो ये सही ठीक दिशा जा रहे हां गलत दिशा में तक जा रहे हैं ऐमे एक बार किसे दी गल बंद के अखा बिगे तो रहना गलत रास्ते ਲੋਕ ਕਹੀ ਜਾਂਦੇ ਗਲਤ ਰਹਿਤਾ ਫਿਰ ਵੀ ਨਾ ਮੰਨਦਾ ਉਹ ਕੱਟਿਆ ਬਾਹਰ ਬਾਹਰ ਜੋ ਤੁਸੀਂ ਇੱਕ ਵਾਰ ਸੋਣਦੇ ਹੋ ਤੇ ਵਿਚਾਰ ਵੀ ਕਰਦੇ ਰਹੋ ਜੇ ਕੋਈ ਤੁਹਾਨੂੰ ਬਾਹਰ ਮੰਦਾ ਕੋਈ ਗੱਲ ਕਹਿੰਦਾ ਤੇ ਵਿਚਾਰ ਕਰਦਾ ਕੋਈ ਹਰਜ ਨਹੀਂ ਜੋ ਕਹਿੰਦਾ ਵੀ ਇਸ ਤਰ੍ਹਾਂ ਗਲਤਾਂ ਵਿਚਾਰ ਕਰਦਾ ਕੋਈ ਹਰਜ ਨਹੀਂ ਇਹ ਸਮਝਾ ਦੋ ਜਾਂ ਸਮਝ ਲਓ ਜੇ ਤੁਸੀਂ ਸਮਝਾ ਸਕਦੇ ਹੋ ਉਹ ਨਹੀਂ ਸਮਝਦਾ ਤੁਸੀਂ ਆਪਣੀ ਤਸੱਲੀ ਕਰ ਵੀ ਮੈਂ ਤਾਂ ਨਹੀਂ ਹੈਗਾ ਉਲਟ ਕਿਆ ਪਾਊਡਰੀ ਕੋਈ ਗੱਲ ਨਹੀਂ ਜੋ ਨਹੀਂ ਮੰਨਦਾ ਨਾ ਬੰਦੇ ਕਾ ਭਾਈ ਤੂੰ ਨਾ ਬਣ ਕੋਈ ਗੱਲ ਨਹੀਂ ਜੇਕਰ ਗੱਲ ਸੁਣਨ ਦੇ ਵਿੱਚ ਦਾ ਜੇ ਅਸੀਂ ਕਈ ਵੇ ਅਸੀਂ ਸੁਣਦੇ ਹੋ ਨਹੀਂ ਵਿਚਾਰ ਕਰਦੇ ਹੋ ਹੀ ਨਹੀਂ ਉਹ ਗੱਲ ਜਿਹੜੀ ਹੈਗੀ ਆ ਉਹ ਕਟੜ ਪਰਥੀ ਬਣਾ ਦਿੰਦੀ ਹੈ ਪੂਰ ਘਮੜਉਂਦੀ ਆ ਉਸ सेमर सेमर ना बारंग बार नानक ना अदार। जी का ये आधार नानक जी का ये आधार जीदा आ रहे है जे आधार है थोड़ा गलत है त डुबो दू बड़ो आधार नु हर बक्त वो आधार दी मतलब टेस्ट करना चाहिए कि आधार स गलत ता नहीं असि गलत आधार ते कभी खड़े कते कमजोर ता नहीं छाटी ਪਰ ਆਧਾਰ ਖਬਜ਼ੂਰ ਸਾਦੀ ਹੈ ਖਬਜ਼ੂਰ ਆਧਾਰ ਕਿਤਨਾ ਗਦ ਡੁੱਬ ਜਾਊਗਾ ਲੈ ਨਾ ਹਾਂ